लोक मोहल्ला चौथा सब रस तिन के रिदे हैं जिन हर बसिया मन माहे हर दरगे ते मुख ले तिन को सब देखण जाहे ओना रस ते रस हां रस जाणता होणे क्योंकि बेशक आमदा ठीक है ਇੱਥੇ ਵਿਚਾਰ ਤਬੀਅੰਦੇ ਤੇਰਾ ਅਸਰ ਹੋਰ ਅੰਗਰਗੋਬ ਸਾਹਿਬ ਵਿਤਰੇ ਹਾਰਵਤੇ ਹਾਏ ਜਿਹੜੇ ਅੰਦਸ ਤੇ ਹੋਰ ਅੰਦਸ ਅਸੀਂ ਅਸਲ ਦੇ ਵਿੱਚ ਹੈਗਾ ਸਾਡੇ ਕੋਲ ਡਿਕਸ਼ਨਰੀ ਸੀਗੀ ਤੇ ਸਾਡੇ ਕੋਲ ਸੰਸਾ ਆ ਉਹ ਹੈਗੀ ਸੰਸਾ ਲੋਕਾਂ ਦੀ ਸਾਡੀ ਆਪਣੀ ਜੋ ਅਸੀਂ ਖਾਂਦੇ ਆ ਬਾਹਲੇ ਸਰੀਰ ਵਾਸਤੇ ਉਹ ਰਸ ਲੈ ਸਾਡੇ ਵਾਸਤੇ। ਭਾਵੇਂ ਦੋਹਾਂ ਨੂੰ ਹੀ ਰਸ ਖਾਣਿਆ ਪਰ ਜਾਨਵਰਾਂ ਵਾਂਗ ਅਸਤਾ ਤਾਂ ਸਾਡਾ ਆ ਬਾਇਆ ਦੇਡੇ ਰਸ ਖਾਣ ਵਾਲੇ ਦੇ ਸਰੀਰ ਵਾਸਤੇ ਬਾਹਲੇ ਸਰੀਰ ਵਾਸਤੇ ਉਹ ਰਸ ਲੈ। ਠੀਕ ਹੈ। ਉਹਨਾਂ ਨੂੰ ਅਸੀਂ ਦਸਖੈ। ਉਹਦੇ ਵਿੱਚ ਖਾਟਿਆ ਇਸ ਮਿੱਠਾ ਰਸ ਭੋਜਨ ਪ੍ਰਕਾਰ ਪ੍ਰਕਾਰ ਦੇ ਭੋਜਨ ਦੇ ਦੇ ਰਸ ਲੈ। ਇਹ ਰਸ ਅਸੀਂ ਲੈ ਕੇ ਚੱਲਦੇ ਅਕਸ਼ਧਰੀ ਵਿੱਚ ਸਪੜੀ। ਇਹੀ ਲਾਗੇ ਚੱਲੇ ਰਹੇ ਆ ਠੀਕ ਆ ਨੇ ਸਿੱਧੀ ਸੰਸਾਰੀ ਆਦਮੀ ਸੀ ਉਹ ਵਿਦਵਾਨ ਅਸਲ ਦੇ ਵਿੱਚ ਭਾਸ਼ਾ ਦਾ ਇਹ ਸੁਧਾਰੀ ਸਾਡੇ ਆਈ ਵਿਸ਼ਾ ਉਹ ਨਾ ਹੈ ਜਿਨ੍ਹਾਂ ਨੇ ਭਾਸ਼ਾ ਬਣਾਈ ਹੈ ਇਹ ਭਾਸ਼ਾ ਘੜੀ ਹੈ ਬਿਸ਼ਾ ਸンス ਸਾਰੀ ਆਲਮੀ ਰਣੀ ਹੈ ਬਿਸ਼ਾ ਦੂਤਾਰੀ ਆਲਮੀ ਦਾ ਸਾਰਾ ਸੰਸਾਰ ਪਾਤਵੀ ਹੈ। ਇਹਨਾਂ ਤੋਂ ਪਰ ਹੋਣਾ ਹੈ ਨਿਰਾਲਤ ਵਿੱਚ ਜੁੜਨਾ। ਸੱਚਖੰਡ ਵਿੱਚ ਨਿਰੰਕਾਰ ਹੋ ਜਾਂਦਾ ਆਕਾਰ ਰਹਿਤ ਹੋ ਜਾਂਦਾ ਸ਼ਰੀਰ ਤਿਆਗ ਦੇਣਾ, ਮਾਇਆ ਤਿਆਗ ਦੇਣੀ ਹੈ ਫਿਰ ਇਹ ਸੱਚਖੰਡ ਹੁਣ ਮਾਇਆ ਦੇ ਵਿੱਚ ਚੌਂ ਚੱਕ ਬੂਟੇ ਰੂਪਾਂ ਨੂੰ ਸੱਚਖੰਡ ਦੇ ਵਿੱਚ ਲਾਉਂਦੇ। ਮਾਤਾ ਨੂੰ ਸੰਸਾਰ ਚੋਂ ਪੱਟ ਕੇ ਸੰਸਾਰ ਦੇ ਵਿੱਚੋਂ ਪੱਟ ਕੇ ਬੰਦੂ ਸੰਸਾਰ ਚੋਂ ਬੋਲੀ ਦੇ ਨਾਲੇ ਸਾਨੂੰ ਚੱਲਦਾ ਬਹੁਤ ਆਦਮੀ ਤਾਂ ਸਾੜੀ ਬੋਲੀ ਜਾਣਦਾ ਉਹਦੀ ਬੋਲੀ ਚ ਬੋਲਣਾ ਪਊ ਉਹਦੀ ਬੋਲੀ ਚ ਉਹਨੂੰ ਸਮਝਾਉਣਾ ਪਊਗਾ ਜੀ ਜੋ ਬੋਲੀ ਸੰਸਾਰੀ ਆਦਮੀਆਂ ਦੀ ਹੈ ਵਿਸ਼ਾਦ ਸੰਸਾਰੀ ਇਸ ਕਰਕੇ ਬਹੁਤ ਸਾਰੇ ਲਾਹੂ ਦੇ ਉਹਨਾਂ ਦੇ ਅਰਥ ਜਿਹੜੇ ਵੇਖ ਅਸੀਂ ਸੰਸਾਰੀ ਸੱਤਵੇਂ ਦੇ ਸਾਰੀਆਂ ਜੋੜ ਤੇ ਦੇਣਾ ਇਸ ਕਰਕੇ ਸਾਰਿਆਂ ਨੂੰ ਲਾਹੂ ਅਰਥ ਬਾਕਾਇਦਾ ਬਦਲੇ ਹੋਏ ਨੇ ਜਿਵੇਂ ਉਹਨਾਂ ਨੇ ਕਿ ਕਿ ਅੱਜ ਇਹ ਨਾ ਸਮਝਦੇ ਜਿਹਦੇ ਅੱਥਾ ਕੁੱਤੇ ਦੇ ਦੇ ਦੇ ਨਹੀਂ ਉਹ ਵੀ ਨੇ ਸਾਡੀ ਭਾਸ਼ਾ ਚੰਦਾ ਉਹ ਹੈ ਅੰਦੇ ਸਹੀ ਦਾਨ ਕਾ ਜੋ ਖਸਮ ਕੁੱਤੇ ਜਾਂ ਜਿਹਨਾਂ ਨੂੰ ਸੱਚ ਨਹੀਂ ਪਛਾਣ ਲਈ ਆਪਣੀ ਗੋਲ ਨਹੀਂ ਪਛਾਣ ਲਈ ਆਪਣਾ ਗੋਲ ਨਹੀਂ ਜਾਣਿਆ ਜਿਹਨਾਂ ਦੇ ਉਹ ਆਨੇ ਸੀ ਹੁਣ ਅੱਲਾਹ ਗੁਰੂ ਹਰਗੋਬਿੰਦ ਸਾਡੇ ਕੋਲ ਪਾਚਾ ਇਹ ਹੀ ਹੈ ਬਦਲ ਦਿੱਤੀ ਹਰਸ ਬਦਲ ਤੇ। ਉਹ ਇਹ ਅਸਚੇਲੇ ਲਾਫਦਾ ਆ ਮੈਂ ਕਹਿਣ ਦਾ ਹੁਣ ਮਤਲਬ ਇਹ ਸਿਵੇਰਾ ਇਹ ਰਸਵੀ ਇਸੇ ਤਿੱਕੇ ਨਾਲ ਠੀਕ ਹੈ ਜੀ। ਰਸਮੁੰਦੀ ਨੂੰ ਰਸਤਾ ਦੀ ਹਰ ਦੂਏ ਰਸਵੀ ਬੁੱਧੀਆ ਲੈਂਦੀ ਹੈ ਚਾਹੇ ਉਹ ਦੱਸਦੀ ਹੈ ਖੱਟਾ ਮਿੱਠਾ ਤੌੜਾ ਖਿਆਲਾ ਉਹੀ ਦੱਸਦੀ ਹੈ ਪਰ ਉਹ ਸਰੀਰ ਨੂੰ ਸਵੱਥ ਤੇ ਰੱਖਦੇ ਠੀਕ ਹੈ। ਉਹ ਜਦੋਂ ਆਵਣ ਨੂੰ ਬਿਠਾ ਕੇ ਵੀ ਕੇ ਕੋਣਾ ਐਗੀਕਲ ਸੀਰੀਸ ਵਾਲੇ ਵਗੈਰੇ ਦੀ ਵੀਦੋਬ ਤੇ ਮਿੱਠਾ ਹੁੰਦਾ ਉਹ ਗੁਬਾਰੀ ਨਾਮ ਨੂੰ ਕੌੜਾ ਬੋਲਦੀ ਹੈ ਠੀਕ ਆ ਸੱਚ ਮਿੱਠਾ ਵੀ ਹੁੰਦਾ ਉਹ ਗੁਰਮਖਾ ਨੂੰ ਜਿਹੜਾ ਮਿੱਠਾ ਲੱਗਦਾ ਸਾਨੂੰ ਕੌੜਾ ਲੱਗਦਾ ਜਿਹੜਾ ਗੁਰਮਖਾ ਨੂੰ ਕੌੜਾ ਲੱਗਦਾ ਸਾਨੂੰ ਮਿੱਠਾ ਲੱਗਦਾ ਗੱਲ ਆ ਉਲਟ ਠੀਕ ਹੈ ਜੀ ਜਿਹੜੇ ਖਾਵੇ ਰੱਖਦੇ ਜਿੰਨੇ ਦੁਨੀਆਂ ਦੇ ਗਿਆਨ ਦੇ ਦੁਨੀਆਂ ਦੇ ਜਿੰਨੇ ਧਰਮ ਦੇ ਸਾਰੇ ਵਿੱਚ ਗਿਆਨ ਹੈ ਕੁਝ ਨਾ ਕੁਝ ਇਸ ਕਰਕੇ ਜਿੰਨੀ ਕ ਆਦਮੀ ਦੀ ਹੁੰਦੀ ਹੁੰਦੀ ਹੈ ਜਿਹੜੇ ਜਿਹਨੂੰ ਸਟੇਜ ਹੁੰਦੀ ਹੈ ਉਹਦੀ ਕਰ ਲੈਂਦਾ ਉਹ ਖੜ ਜਾਂਦਾ ਉਹਦੋਂ ਗਾਹਾਂ ਦਾ ਕਿਉਂਕਿ ਪ੍ਰਾਇਮਰੀ ਦੀ ਪੜਾਈ ਚੱਲਣੀ ਹੈ ਹਾਂ ਤੱਕ ਜਾਣੀ ਹੈ ਪ੍ਰਾਇਮਰੀ ਤੋਂ ਹੀ ਜੇ ਪੜਾਈ ਦਾ ਜੇ ਪ੍ਰਾਇਮਰੀ ਸਕੂਲ ਨਾ ਹੋਣ ਤਾਂ ਮਿਡਲ ਕਿਤੋਂ ਦੇ ਮਿਡਲ ਨਾ ਹੋਣ ਤੇ ਤਾਂ ਆਈ ਕਿਤੋਂ ਚੱਲੇ ਆਈ ਨਾ ਹੋਣ ਕਿਤਾ ਕਾਲਜ ਇਕ ਤੋਂ ਹੋਊਗਾ ਕਾਲਜਾ ਹੋਣ ਦੇ ਤੱਕ ਦਿਵਸ ਇਹ ਚੱਲੂਗੀ ਫੇਸ ਕਰਕੇ ਰਸ ਬਹੁਤ ਨੇ ਯਾਰ ਬਹੁਤ ਨੇ ਥੱਲੇ ਤੋਂ ਲੈ ਕੇ ਉੱਤੇ ਤੱਕ ਹਰ ਪ੍ਰਕਾਰ ਦਾ ਗਿਆਨ ਉਹ ਸਾਡੇ ਕੋਲ ਹੈ ਜਿਹਦੇ ਕੋਲ ਬ ਬੁੱਧੀ ਹੋਵੇ ਕਹਿਣਾ ਮਤਲਬ ਇਹ ਸਮੇਂ ਦਾ ਜਿਹਨੇ ਵੀ ਕਰ ਲਈ ਉਹਦੇ ਕੋਲ ਥੱਲੇ ਦੀ ਕਲਾਸਾਂ ਸਾਰੀਆਂ ਦਾ ਗਿਆਨ ਹੈ ਇਹ ਕਹਿਣੋ ਇਹ ਸਾਰੇ ਰਸ ਤਿੰਨ ਕੇ ਰਿਦੇ ਹੈ ਜਿਨ ਹਰ ਵਸਿਆ ਆ ਆ ਦੇਖ ਕੋਲ ਆ ਗਈ ਹਰ ਵਸ ਗਿਆ ਉਹਦੇ ਕੋਲ ਸਾਰੀ ਗਿਆਨ ਹੁੰਦੇ ਨੇ ਬਾਕੀ ਥੱਲੇ ਦੇ ਬਾਕੀ ਸਾਰੇ ਥੱਲੇ ਹੀ ਨੇ ਇਹ ਤਾਂ ਥੱਲੇ ਦੀਆਂ ਕਲਾਸ ਨਹੀਂ ਨੇ ਇਹਦਾ ਮਤਲਬ ਇਹ ਕਹਿਣ ਦਾ ਹੁਣ ਜੇ ਅਸੀਂ ਦੂਰੇ ਨਾਲ ਲਾਈਏ ਮਿੱਠੇ ਜਿ ਖਟਾ ਖੱਟੇ ਜੀ ਬੋਤਾ ਉਹ ਸਾਥੇ ਨਹੀਂ ਹੋਣਾ ਫਿਰ ਸੂਤ ਕੰਮੇ ਤੇਰੇ ਪੰਕਤੀ ਦੇ ਅਰਥ ਨਹੀਂ ਹੋਣੇ ਹਰ ਦਰਗੇ ਤੇ ਮੁਖ ਉਜਲੇ ਤਿੰਨ ਕੋ ਦੇਖਣ ਜਾਹੀ ਉਹ ਹਿਰਦੇ ਵਿੱਚ ਹੈ ਹਰ ਦਰਗਾਹ ਦੇ ਵਿੱਚ ਜਾ ਕੇ ਉਜਲੇ ਦੇ ਉਹ ਪਰਮਾਉਲ ਦਰਗਾਹ ਦੇ ਵਿੱਚ ਵੀ ਉਜਲੇ ਹੀ ਕਿਉਂ ਕੁਝਲੇ ਕਿਉਂ ਰਹਦੇ ਦੂਏ ਦਿਲ ਕਿਉਂ ਦੇ ਰਹੇ ਨੇ ਹੁਣ ਆਪਾਂ ਇਹਦਾ ਵੀ ਚੱਲਦੀ ਵੀ ਉਹ ਕਾਦੇ ਜਿਲੇ ਰਹਿੰਦੇ ਨੇ ਦੂਏ ਕਿਉਂ ਦੇ ਜਿਲੇ ਰਹਿੰਦੇ ਕੀ ਬਲੇ ਸਾਰੇ ਹੁੰਦੇ ਨੇ ਰਾਤ ਨੂੰ ਵੀਂਦੇ ਫਰੂ ਸਾਰਿਆਂ ਦੇ ਵਿੱਚ ਘੱਟ ਵੱਧ ਰੋਸ਼ਨੀ ਹੁੰਦੀ ਹੈ ਜਾਂ ਵੀ ਹੁੰਦਾ ਜਾਂ ਦਰਵਾ ਜਿਆਦਾ ਰੋਸ਼ਨੀ ਸਾਰਿਆਂ ਨੂੰ ਸਾਰਿਆਂ ਨੂੰ ਪਰ ਜਦੋਂ ਸੂਰ ਚੜਦਾ ਹੈ ਤਾਂ ਸਾਰੇ ਹੀ ਕੋਈ ਨੀਂਦੀ ਦਾ ਤਮੇਦੀ ਜੀ ਇਸ ਕਰਕੇ ਉੱਥੇ ਦਰਗਾਹ ਦੇ ਵਿੱਚ ਸੂਤੀ ਚੜਿਆ ਹੋਇਆ ਦੂਰੇ ਤੋਂ ਤਾਰੇ ਦੇ ਵਿਵੇਕ ਬੁੱਧੀ ਤੋਂ ਸਵਾ ਬਾਕੀ ਸਭ ਧਰਮ ਵੱਡੇ ਵੱਡੇ ਉਹਨਾਂ ਨੂੰ ਚੰਦਰਮਾਨ ਤੋਂ ਕਿਸੇ ਰੂਪ ਅਤੀ ਨਹੀਂ ਇਸ ਕਰਕੇ ਇਹਨਾਂ ਦੇ 16 14 ਕਲਾ 16 ਕਲਾ ਹੀ ਰੱਖਿਆ ਹੋਇਆ ਜੀ ਸੋਲਾ ਕਲਾ ਕੀ ਹੁੰਦਾ ਸੋਲਾ ਕਲਾ ਕਿੱਦਾਂ ਹੁੰਦਾ ਜਦੋਂ ਸੱਤੀ ਗੌੜੀ ਹੈ ਜਿਹੜੀ ਕਬੀਰ ਦੀ ਉਹਦੇ 'ਚ ਚੰਦਰਬਲ ਦੀ ਕਲਾ ਹੀ ਦਸੀਆਂ ਨੇ ਬੱਚਿਆ ਤੇ ਮੈਂ ਕਿਉਂ ਉਸ ਕੋਸ਼ਿਸ਼ ਕਰਾਂ ਜਿਹੜੀ ਸੱਤੀ ਗੌੜੀ ਹੈ ਉਹ ਗੌੜੀ ਆਕਤੀ ਹੈ ਹੋਵਾ ਗੌੜੀ ਦੀ ਬਾੜੀ ਹੈ ਜਲਦੀ ਆਪਣੀ ਹਾਂਜੀ ਉਹਦੇ ਵਿੱਚ ਬੱਥਿਆ ਤੋਂ ਸ਼ੁਰੂ ਕਰਦੇ ਬਿਲਕੁਲ ਗਿਆਨਤਾ ਦੇ ਵਿੱਚੋਂ ਸ਼ੁਰੂ ਕਰਕੇ ਲੈ ਕੇ ਇੱਕ ਦੂਜ ਤੀਜ ਇਹ 16 ਕਲਾ ਬਣਦੀ 16 ਕਲਾ ਲਾਸਟ ਦੇ ਮੇਸ਼ਰ ਨੂੰ 16 ਕਲਾ ਅਵਤਾਰ ਬੰਦ ਦੇ ਰੱਖਦੇ ਦੁੱਧ 16 ਕਲਾ ਬੰਦ ਦੇ ਰਿਹਾ ਇਹਦਾ ਬੰਦ ਦੇ ਰਿਹਾ ਲੋਕਾ ਕੰਿਸ਼ਨ ਦੇ ਗੀਤਾਂ ਲਿਖੀ ਹੈ ਚਲੋ ਉਹਨਾਂ ਦੀ ਬਤੀ ਹੈ ਜਿਵੇਂ ਬਤੀ ਬੰਦ ਨੇ ਆਪਾਂ ਸਿੱਖ ਮਿਸਾਲ ਉਧਾਰ ਲਈ ਹੈ ਭਾਸ਼ਾ ਦੇ ਵਿੱਚ ਆਇਆ ਹੋਇਆ ਜਿਹੜਾ ਹੈ ਕੀ ਹੈ ਜੇਬ ਵੇਕ ਬੁੰਦੀ ਹੈ ਉਹ ਤਾਂ ਸੂਰਜ ਹੈ ਉਹਦੇ ਤਾਂ ਚੜਿਆ ਹੋਇਆ ਪਹਿਲਾਂ ਹੀ ਆਲਰੇਡੀ ਕਬੀਰ ਕਹਿ ਰਿਹਾ ਨਾ ਸਈ ਕਬੀਰ ਮਨ ਭਿਆ ਪ੍ਰਗਾਸਾ ਉਹਦੇ ਭਾਂਜਬ ਚੀਲੋ ਉਹ ਤਾਂ ਆਪੇ ਸੂਰਜ ਸੂਰਜ ਦੇ ਸਾਹਮਣੇ ਖੁੱਤਾਂ ਨਹੀਂ ਪੈਂਦਾ ਠੀਕ ਹੈ ਤੇ ਚੱਕ ਉਹ ਨਹੀਂ ਚੰਗ ਨਹੀਂ ਕਰਦੀ ਚੰਗਦਾ ਚੱਲਦੀ ਵੀ ਨਹੀਂ ਕਰਦੀ ਉਹ ਨਹੀਂ ਰਹਿੰਦੀ ਪਰ ਉਹ ਨਹੀਂ ਚੱਕ ਉਹ ਬੇਵਰਣੀ ਹੋ ਜਾਂਦੀ ਉਹਦੀ ਲੋਕ ਦਾ ਚੱਲਣਾ ਤੇ ਰੋੜੀ ਚੱਲਣਾ ਸੰਭਾ ਹੈਗਾ ਰਾਤ ਨੂੰ ਕਰਦਾ ਚੱਲੂ ਉਹਨਾਂ ਦੇ ਕੋਲ ਕੁਝਲਾ ਨਹੀਂ ਲੈਂਦੇ ਉਹ ਉਹ ਦੀਨੇ ਰੀਆਂ ਦਿਖਾਈ ਨਹੀਂ ਦਿੰਦੇ ਜਿਵੇਂ ਸੱਤਾਰੇ ਚੰਦ ਕੁਝ ਨਹੀਂ ਨਾ ਦਿਖਾਈ ਦਿੰਦਾ ਕੁਝ ਉਹਨਾਂ ਦਾ ਉਜਲ ਜਿਹੜੇ ਨਹੀਂ ਹੁੰਦੇ ਕੁਝਲੇ ਉਹ ਬਹੁਤ ਕੁਝਲੇ ਨਹੀਂ ਰਹਿ ਸਕਦੇ ਜਿਹੜੇ ਵਿਵੇਕ ਬੁੱਧੀ ਤੋਂ ਸੱਖਣੇ ਵਿਵੇਕ ਬੁੱਧੀ ਵਾਲੇ ਹੀ ਉੱਥੇ ਜਾ ਕੇ ਕੁਝਲੇ ਰਹਿੰਦੇ ਰੋਟੀ ਲਾਈਟ ਰਹਿੰਦੀ ਉਹਨਾਂ ਦੀ ਕਿਉਂਕਿ ਬੁੱਢੀ ਉਮਰ ਵਿੱਚ ਸੀ ਉਹਨਾਂ ਦੀ ਆਪਣੀ ਹੁੰਦੀ ਹੋਈ ਨਹੀਂ ਇਹ ਆਪਣੀ ਬਸ ਉਹਨਾਂ ਦੀ ਹੁੰਦੀ ਨਹੀਂ ਆਪਣੀ ਸ਼ਰਤ ਤੇ ਮੇਰੀ ਬਸ ਥੋੜੀ ਰਾਹ ਥੋੜੀ ਕਹਿ ਕੇ ਉਹਨੇ ਤਿਆਰ ਕੀਤੀ ਪਰਮੇਸ਼ਰ ਦੀ ਗੱਲ ਲੈ ਲਈ ਇਹ ਉਹਨਾਂ ਕੋਲ ਆਪਣੀ ਹੁੰਦੀ ਆਪਣੀ ਆਪਣੀ ਹੈ ਜਿੱਦਾਂ ਜਿਹੜਾ ਆਪਣੀ ਮਸਤ ਆਪਣੀ ਹੁੰਦਾ ਉਹਨਾਂ ਚ ਜਾ ਕੇ ਠੀਕ ਹੈ ਜੀ ਤੇ ਦੋ ਪੰਜ ਉਹ ਪੁਆਇੰਟ ਹੈਗੇ ਜਿਹੜੇ ਸਮਝਾਏ ਸੀ ਯਾਨੀ ਵੀ ਲਾਗੂ ਹੋ ਗਏ ਜਾ ਕੇ ਕੁਝ ਨੇ ਬਹੁਤ ਵਾਰ ਆਊਗਾ ਗੁਰਬਾਣੀ ਚ ਉਹ ਕੁਦਲੇ ਦੀ ਵਾਕਿਆ ਇੱਥੇ ਇੱਕ ਵਾਰ ਥੱਤੀ ਤਿੰਨ ਕੋ ਸਭ ਦੇਖਣ ਜਾਹੇ ਉਹਨਾਂ ਨੂੰ ਸਾਰੇ ਦਿਖਣ ਜਾਂਦੇ ਨੇ ਜਿਵੇਂ ਹੁਣ ਭਗਤ ਕਬੀਰ ਹੈ ਗੁਰੂ ਘਰ ਦੇ ਵਿੱਚ ਪਤਾ ਲੱਗਿਆ ਗੁਰਦਵਾਰਾ ਦਾ ਦੁਨੀਆ ਹੁੰਦੀ ਹੈ ਦੇਖਣ ਬੜਾ ਨੇ ਇਹ ਗੱਲ ਜਦੋਂ ਕੋਈ ਭਗਤ ਪ੍ਰਗਟ ਹੁੰਦਾ ਹੈ ਤਾਂ ਦੁਨੀਆ ਦੇਖਣ ਜਾਂਦੀ ਹੋਈ ਹੈ ਬੜਾ ਜਾਂਦਾ ਹੀ ਤੇ ਲੋਕ ਜਿਹਨ ਨਿਰਪਉ ਨਾਮ ਤੇ ਆਇਆ ਤਿੰਨ ਕੋ ਭਉ ਕੋਈ ਨਹੀਂ ਹਾਂ ਜਿਹਨਾਂ ਦੇ ਨਿਰਪਉ ਨਾਮ ਜਿਹੜੇ ਨਾਮ ਕੇ ਅੱਛਾ ਕੇ ਵੀ ਦੋ ਵੀ ਨੇ ਕਹਿਤਾ ਭੈ ਕਾਂ ਨੂੰ ਦੇ ਧਰਮ ਦੇ ਇਹ ਦੇ ਕੇ ਹੀ ਉਹ ਦੇਵੀ ਦੇਵਤੇ ਬਣੇ ਨੇ ਭੈ ਦੇ ਕੇ ਹੀ ਅਵਤਾਰ ਬਣੇ ਨੇ ਜਦੋਂ ਆਣਾ ਨੇ ਧਿਰ ਪੈ ਦੀ ਗੱਲ ਕੀਤੀ ਹੈ ਨਾ ਧਿਰ ਪੈ ਪਰਮਿਸ਼ਨ ਧਿਰ ਪੈ ਜਪਾ ਥੱਲ ਪੈ ਪਵਣ ਜਿਨ੍ਹਾਂ ਨੇ ਧਿਰ ਪੋਜਾ ਭਲਿਆ ਉਹਨਾਂ ਦਾ ਪਉ ਨਹੀਂ ਰਿਹਾ ਫਿਰ ਉਹ ਹੈ ਹੁਕਮ ਪਰਮਿਸ਼ਾਦਾ ਜਿਹੜਾ ਸਾਰੇ ਚੱਲਦਾ ਇਹਦੇ ਪੈ ਵਿੱਚ ਸਾਰੇ ਚੱਲਦੇ ਸੂਰਜ ਦੇ ਪ੍ਰਾਈਵੇਟ ਪਬਲ ਪਾਏ ਸਨ ਪਉ ਪੈ ਵਿੱਚ ਚੱਲੇ ਲਖਦ ਰਿਹਾਓ ਇਹ ਹੈ ਸਿਰੇ ਦਾ ਆਖਰੀ ਸਬਕ ਆਖਰੀ ਕੋੜੀ ਦੀ ਗੱਲ ਇਹ ਇੱਥੇ ਅੱਗੇ ਮਤਲਬ ਪੇਸ਼ ਹੁੰਦਾ ਹੈ ਕਿ ਇਹ ਧਰਮ ਅਜਿਹਾ ਤਿੰਨ ਤਿੰਨ ਨਿਰਪੋ ਨਾਮ ਧਿਆਇਆ ਤਿੰਨ ਕੋ ਭੋ ਕੋਈ ਨਾ ਹੈ ਜਿਹਨੇ ਹੁਕਮ ਜਿਹੜੇ ਨਿਰਪੋ ਹੁਕਮ ਧਿਆ ਲਿਆ ਨਿਰਪੋ ਜਿਹਨੂੰ ਕੋਈ ਭੈ ਨਹੀਂ ਦਾ ਪਰਮੇਸ਼ਰ ਨੂੰ ਕਹਿੰਦੀ ਭੈ ਨਹੀਂ ਉਹਦਾ ਹੁਕਮ ਨਾਲ ਜਿਹੜੇ ਜੁੜ ਗਏ ਉਹਨਾਂ ਦੇ ਸੁਭਜ ਰਿਹਾ ਧਿਆ ਲਿਆ ਤੇ ਆਨ ਉਹਦੇ ਵਿੱਚ ਜੀਲਾ ਜਾਨੀ ਉਹਦੀ ਸੁਰਤ ਸ਼ਬਦ ਨਾਲ ਜੁੜ ਗਈ ਉਹਨਾਂ ਕੋਈ ਦਰਕ ਸੁਰਗ ਪਉਪ ਪਾਪ ਕਿਸੇ ਚੀਜ਼ ਦੀ ਕੋਈ ਭੈ ਨਹੀਂ ਜਦ ਉਹ ਮਰਦੀ ਚਾਸ ਅਪਜਸਦੀ ਹਾਲੀ ਲਾਭ ਦੀ ਕੋਈ ਭੈ ਨਹੀਂ ਰਹਦੀ ਹਰ ਉੱਤਮ ਤਿਨੀ ਸਰੇਵਿਆ ਜਿਨ ਕੋ ਤੁਰ ਲਿਖਿਆ ਆਹੀਂ ਲਿਖਿਆ ਸੀ ਜਿਹੜਾ ਲਿਖਿਆ ਹੋਇਆ ਸੀ ਨਾ ਪਹਿਲਾਂ ਜਨਮ ਤੋਂ ਪਹਿਲਾਂ ਕੁਝ ਲਿਖਿਆ ਸੀ ਲਿਖ ਕੇ ਆਏ ਸੀ ਹੋ ਵੀ ਕਿਹਾ ਉਹ ਵੀ ਜੋ ਰਿਹਾ ਭੁੱਲੇ ਨਹੀਂ ਹੋ ਮਿਟਿਆ ਹੀ ਨਹੀਂ ਉਹ ਜੇ ਕਿਤੇ ਭੁੱਲ ਵੀ ਗਏ ਗਿਟ ਵੀ ਗਏ ਤਾਂ ਉਹਨੂੰ ਯਾਦ ਆ ਗਿਆ ਉਹ ਫਿਰ ਕਿਸੇ ਦੇ ਖਰਾਸਾ ਇਹਦਾ ਸਿਵਾ ਅਗਲਾ ਫਿਰ ਨਾ ਸਿਵਾ ਉਹ ਸਿਵਾ ਲੋਹੀਆ ਸਿਵਾ ਲੋਹੀਆ ਪਿੱਤ ਜਦੋਂ ਉਹ ਜਾਪ ਪੂਰਾ ਹੋਏ ਫਿਰ ਉਹਨੂੰ ਪਤਾ ਉਹ ਹੋ ਬੇਟਾ ਆ ਕਦ ਆਇਆ ਯਾ ਕਦ ਸੀ ਉਸੇ ਬੁੱਲ ਹੋ ਗਿਆ ਉਹਦਾ ਕਿਉਂਕਿ ਧਿਆਨ ਉਸ ਕਭ ਚ ਰਹਿੰਦਾ ਜਾਕੋ ਆਏ ਸੋਈ ਬਹਜੋ ਜੇ ਆਕੋ ਆਏ ਸੋਈ ਬਹਜੋ ਹੈ ਇਹਦੇ ਚ ਜਿਆਦਾ ਧਿਆਨ ਲੈਂਦਾ ਉਸੇ ਬੁੱਲ ਹੋ ਗਿਆ ਉਹਦਾ ਜਦ ਲਈ ਉਹਨੂੰ ਸਮਝਣ ਧਿਆਨ ਚ ਰਹਿੰਦੇ ਆ ਗੱਲ ਵੀ ਮੈਂ ਆਈ ਕੰਦੀ ਹੂੰ ਮੈਂ ਆਇਆ ਇੱਥੋਂ ਬਈ ਹੀਰੇ ਚਟਣ ਪੱਥਰਾਂ ਦੇ ਵਿੱਚੋਂ ਲੁਕੇ ਹੋਏ ਤੇ ਕਿਤੇ ਵਿੱਚ ਤੇ ਧੀਰੇ ਹੀਰੇ ਚਟਣਾਂ ਦੇ ਪੱਥਰ ਨਹੀਂ ਜਖੜਨੋ ਮਦੂਤ ਤਾਂ ਜਲੀ ਬਣਦਾ ਹੈ ਕਹਿਣਾ ਮਤਲਬ ਹੈ ਹਰ ਉਤਮ ਜੀ ਨੇ ਸਰੇਵਿਆ ਜਿਹੜਾ ਲਿਖਿਆ ਜੀ ਨਾ ਵੀ ਚੀਜ਼ ਲੈਣ ਹੋਏ ਉਹ ਆ ਉਹ ਸਿਮਨ ਦੇ ਵਿਚੀ ਨਾਲ ਦੇ ਰਹੇ ਉਹ ਉਹੀ ਇਹ ਕੰਮ ਕਰਦੇ ਨੇ ਠੀਕ ਹੈ ਇਹ ਉਤਮ ਸਰੇਵਿਆ ਉਤਮ ਕੁਝ ਤਮ ਸੇਵ ਹੈ ਠੀਕ ਹੈ ਜਨਮ ਤੁਹਾਰੇ ਲਿਖੇ ਜਿਹੜਾ ਜਨਮ ਤੁਹਾਰੇ ਲਿਖੇ ਇਹ ਜਨਮ ਨਾਲੇ ਲਿਖਿਆ ਇਹ ਜਨਮ ਤੁਹਾਰੇ ਲਿਖੇ ਜਦੋਂ ਜਨਪਦਾਰਥ ਮਿਲ ਜਾਂਦਾ ਹੈ ਉੱਤੇ ਬਾਦ ਹੋਰ ਕੋਈ ਕੰਮ ਨਹੀਂ ਕਰਦੇ ਤੇ ਜਿਹਦੇ ਜਲਬ ਦਿੱਤਾ ਹੈ ਜਿਹੜੀ ਮੱਤ ਦੇ ਉਹਦੇ ਉਸ ਮੱਤ ਦੇ ਲੈ ਕੇ ਲਾਉਣੇ ਪੈਂਦੇ ਹੋ ਜਨ ਨੂੰ ਉਸ ਮੱਤ ਠੀਕ ਹੈ ਜੀ ਹਰ ਦਰਗਹ ਪਹਿਨਾਈਆਂ ਜਿੰਨ ਦੇ ਅ ਹਰ ਆਪ ਬੁਠਾ ਆਪ ਭੁਲੇ ਆ ਕੇ ਬੁਠਾ ਤੇ ਬਸ ਲੋ ਬੁਠਾ ਆਪ ਜਿਹਨੇ ਆ ਕੇ ਆਪ ਗਿਆਨ ਆਪ ਅਗਰਤ ਦੀ ਧਾਰਾ ਬਣ ਕੇ ਬੱਥੇ ਹੀ ਦੇ ਅੰਦਰ ਆਪ ਹਰ ਬੰਦੇ ਵਿੱਚ ਉਹ ਸਮਝ ਲੋ ਹਰ ਦਰਗਾਹ ਦੇ ਵਿੱਚ ਕਿਉਂ ਉਹਨਾਂ ਦੀ ਧਾਰ ਜਿਹੜੀ ਬੁੱਧੀ ਦੀ ਧਾਰ ਉੱਥੋਂ ਲੱਗੀ ਹੋਈ ਹੈ ਤੇ ਜਿਹੜੀ ਕੀ ਕੱਤੀ ਹੈ ਸੱਚੀ ਕਾਤੀ ਵਿਵੇਕ ਬੁੱਧੀ ਨੂੰ ਕਹਿੰਦੇ ਨੇ ਸੱਚੀ ਕਾਤੀ ਸਤਿ ਸਭ ਸਾਰ ਘਾਟ ਤਿਸ ਕੀ ਅਪਰ ਅਪਾਰ ਸ਼ਬਦ ਸਾਨ ਰਖਾਈ ਲਾਏ ਆ ਸ਼ਬਦ ਦੀ ਸਾਨ ਦੇ ਉੱਤੇ ਰੋਜ਼ ਤੇਜ ਕਰਕੇ ਰੱਖਦੇ ਨੇ ਅਮਰ ਬਖਸ਼ ਬੁੱਧੀ ਨੂੰ ਹਰ ਵਕਤ ਜੇ ਬੋਲਦੇ ਨੇ ਤਾਂ ਵੀ ਧੋਨਤੀ ਸ਼ਬਦਾਂ ਚੋਂ ਹੀ ਆਉਂਦੀ ਜੇ ਨਹੀਂ ਬੋਲਦੇ ਤਾਂ ਵੀ ਉਹ ਵਿਚਾਰ ਕਰਦੇ ਰਹਿੰਦੇ ਨੇ ਗੁਰਬਾਣੀ ਦੀ ਉਹ ਧਾਰ ਉਹਦੀ ਤੇ ਇਹ ਹੁੰਦੀ ਰਹਦੀ ਹੈ ਬੁੱਧੀ ਦੀ ਦਰਗਾਹ ਦੇ ਵਿੱਚੋਂ ਬੁੱਧੀ ਦੀ ਧਾਰ ਤੇ ਜੀ ਦਰਗਾਹ ਹਿਰਦਾ ਤੇ ਦਰਗਾਹ ਹੋਰ ਜੇ ਕੋਈ ਹੋਰ ਦਰਗਾਹ ਜਿਆਦਾ ਦੀ ਹੋ ਰਹੇਗੀ ਕਿਤੇ ਕੋਈ ਕਹਿ ਦਵੇ ਕਿਤੇ ਉੱਥੇ ਹੋਰ ਦਰਗਾਹ ਦੇ ਵਿੱਚੋਂ ਜਿੱਥੇ ਆਪਣੇ ਅੰਦਰ ਹਿਰਦਾ ਦਰਗਾਹ ਠੀਕ ਹੈ ਜੀ ਹਾਂ ਉਹ ਹਿਰਦੇ ਵਿੱਚ ਵਿਚਾਰ ਕਰਦੇ ਨੇ ਸ਼ਬਦ ਸ਼ਬਦ ਨਾਲ ਉੱਥੇ ਧਾਰ ਉਹਦੀ ਲੱਗਦੀ ਰਹਦੀ ਹੈ ਇਹ ਕੰਮ ਹੁੰਦਾ ਹੈ ਧਾਉ ਲਾਉਣੀ ਕਿ ਆਪ ਅਪਤਿਖਾ ਲਫ਼ਜ਼ ਬੋਲਦੇ ਹੋ ਹਾਂਜੀ ਬੜੀ ਤਿੱਖੀ ਹੈ ਤਲਵਾਰ ਆਹ ਉਹ ਬੈ ਨਹੀਂ ਬੋਲਦੇ ਆਪਾਂ ਅਖਿਆ ਲਫ਼ਜ਼ ਕੋਈ ਆਪ ਤਰੇ ਸਭ ਕੁਟੰਬ ਸਿਓ ਤਿਨ ਪੀਛੇ ਸਭ ਜਗਤ ਛਡਾਹੀ ਉਹ ਆਪ ਤਰੇ ਕੁਟਮ ਦੇ ਸਾਰੇ ਜਿਹੜੇ ਇੱਕ ਇਕ ਬਿਤਾ ਇੱਕ ਕਿਸਕੇ ਹਮ ਬਾਰਕ ਮੰਨਦੇ ਦੇ ਬਣ ਜਾਂਦਾ ਜਿਹੜੇ ਨੇ ਨੇ ਉਹ ਇੱਕੋ ਹੀ ਕੁਟੰਬ ਹੈ ਸਾਰੀ ਵਰਲਡ ਵਿੱਚ ਬਸ ਸਾਰੇ ਧਰ ਜਾਂਦੇ ਨੇ ਉਹ ਸਾਭੀ ਧਰ ਜਾਂਦੇ ਨੇ ਕੁਟੰਬ ਧਰ ਜਾਂਦੇ ਉਹਨਾਂ ਦੀ ਗੱਲ ਨਾਲ ਜਿਹੜੇ ਜੁੜਦੇ ਨੇ ਬਣਦੇ ਨੇ ਗੁਰਮਤਿ ਨੂੰ ਸਾਰੇ ਧਰ ਜਾਂਦੇ ਨੇ ਤਿੰਨ ਪਿਛੇ ਸਭ ਜਗਤ ਛਡਾ ਆਉਂਨਾਂ ਦੇ ਪਿੱਛੇ ਜਿਹੜਾ ਜਗਤ ਹੈ ਹੋਰ ਵੀ ਛੁੜਦਾ ਰਹਿੰਦਾ ਹੈ ਜਿੰਨੀ ਕੋਈ ਗੱਲ ਮੰਨ ਲੈਂਦਾ ਜਿੰਨੀ ਜਿੰਨੀ ਕ ਮੰਨ ਲੈਂਦਾ ਹੈ ਕੁ ਤਰੱਕੀ ਕਰ ਲੈਂਦਾ ਚਲੋ ਠੀਕ ਹੈ ਜੇ ਸਾਰੀ ਨਹੀਂ ਕੁਛ ਨਾਲ ਫਾਇਦਾ ਹੁੰਦਾ ਹੀ ਨਾ ਕੁਛ ਨਾਲ ਜਿੰਨੀ ਗੱਲ ਸੁਣਦਾ ਹੈ ਉਹਨਾਂ ਦਾ ਭਰਮ ਦੂਰ ਹੁੰਦਾ ਹਾਂਜੀ ਜਨ ਨਾਨਕ ਕੋ ਹਰ ਮੇਲ ਜਨ ਤਿੰਨ ਵੇਖ ਵੇਖ ਹਮ ਜੀਵਾਹੀ ਹਾਂ ਜਨ ਨਾਨਕ ਕੋ ਕਹਿੰਦਾ ਵੀ ਬੇਨੂੰ ਐਸਾ ਹੀ ਕੋਈ ਜਿਹੜੇ ਨੇ ਜਾਣ ਐਸੇ ਜਾਂਦੇ ਇਹਨਾਂ ਨਾਲੇ ਮੇਰਾ ਬੇਲ ਕਰਾਇਆ ਕਰ ਮਨ ਮੁਖਾ ਦਰ ਰੇਤ ਸੇ ਨੂੰ ਜਿੱਦ ਤੱਕ ਮੇਰਾ ਬੋਲ ਕਰ ਐਸੇ ਜਿਹੜੇ ਜਾਂਦੇ ਨਾ ਜਿਹੜੇ ਆਪ ਕਰੇ ਕੋਟਪਸ ਇਹ ਜਿਹੀ ਸਾਰੇ ਇਹ ਹੋ ਜਾਂਦੀ ਗੁੰਗੁਦ ਦੇ ਨੇਸ਼ ਲੋਕ ਜਿਹੜੇ ਗੁਰਬਾਣੀ ਨੂੰ ਪਹਿਲਾਂ ਆਪ ਜਾਣਦੇ ਸਮਝਦੇ ਹੋਣ ਇਹ ਜਾਦੂ ਦੀ ਭੁਖ ਰਥ ਦੇ ਹੂਰ ਸਿੱਕੋ ਕਤੰਬ ਦੇ ਹੂਰ ਬਾਤੀ ਬੁਖਾ ਤੇ ਉਹ ਅਸੀਂ ਕਿਲੇ ਨੂੰ ਦੂਰੇ ਰਹੇ ਬਿਟੋ ਉਹ ਚੱਗੀ ਗੱਲ ਮਹੱਲਾ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਹਿਰਦੇ ਵਿੱਚ ਧਰਤੀ ਹਿਰਦਾ ਹੀ ਹੈ ਜਿੱਥੇ ਸਤਿਗੁਰੂ ਆ ਕੇ ਮੇਰਾ ਜਿਆਦੀ ਸ਼ਬਦ ਗੁਰੂ ਪ੍ਰਗਟ ਹੋ ਗਿਆ ਜਿੱਥੇ ਸੱਚ ਪ੍ਰਗਟ ਹੋ ਗਿਆ ਉਹ ਤਾਂ ਕਹਿੰਦੇ ਧਰਤੀ ਹਰੀ ਹੋ ਗਈ ਉਹ ਧਰਤੀ ਹਰੀ ਭਰੀ ਹੋ ਗਈ ਸਾਧਗੁਰੂ ਜੀ ਆਪਾਂ ਸਾਧਗੁਰੂ ਮਹਾਰਾਜ ਜੀ ਲਵੋਗੇ ਇਹ ਤਾਂ ਪੋਸਿਬਲ ਨਹੀਂ ਹੈ ਫਿਰ ਗੱਲ ਵੀ ਜਾ ਕੇ ਬੈਠਣ ਪੱਥਰ ਦੇ ਉੱਤੇ ਉੱਥੇ ਹੀ ਹਰਾ ਭਰਾ ਹੋ ਜਵੇ ਇਹ ਗੱਲਾਂ ਐਸੀਆਂ ਨੇ ਜਿਹੜੀਆਂ ਜਿਹੜੀਆਂ ਹੁਣ ਗੱਲ ਕਹਿਣੀਏ ਨਾ ਕਹੀਏ ਤਾਂ ਲੋਕ ਕਲਪਨੇ ਖਰੇ ਦੇ ਲਿਖਾ ਪਾਇਆ ਹੋਏ ਜੇ ਕਈ ਤਾਂ ਉਹ ਕਹਿੰਦੇ ਨੇ ਵੀ ਜੀ ਇਹ ਸਾਡਾ ਪਿਛਲਾ ਕਹਿਆ ਹੋਇਆ ਸਾਰਾ ਰੱਦ ਹੋ ਗਿਆ। ਰੱਦ ਗੁਰਬਾਣੀ ਕੀ ਕਹਿੰਦੀ ਹੈ ਉਹਨੂੰ ਠੀਕ ਤਰੀਕੇ ਨਾਲ ਸਮਝਣ ਨਾਲ ਬਥੜਾ ਹੈ। ਇਹ ਗੱਲ ਸਧਕੇ ਵੀ ਹੈ, ਬਾਹਰੋਂ ਵਿੱਕੀ ਤਾਂ ਜ਼ਰੂਰ ਹੈ, ਬਰੀਕ ਹੈ ਗੱਲ ਬਹੁਤ ਸਮਝਣੀ ਔਖੀ ਹੈ। ਹਨਾ ਤਿੱਕੀ ਨੁਕਸਾਨ ਵੀ ਬਹੁਤ ਕਰ ਦਿੰਦੀ ਹੈ, ਜੀਵਨ ਵੀ ਇਹ ਚਲੇ ਜਾਂਦਾ ਹੈ। ਜੇ ਸਮਝ ਲਈਏ। ਅੱਜ ਅਸੀਂ ਗੁਰਬਾਣੀ ਦੇ ਪੁੱਠੇ ਅਰਥਾਂ ਵਿੱਚ ਬੰਦੇ ਆ ਸਾਰਾ ਜੀਵਨ ਬਰਬਾਦ ਹੋਇਆ ਹੋਇਆ ਆਮੇ ਅਸੀਂ ساری ਜ਼ਿੰਦਗੀ ਸਿੱਖੀ ਵਾਸਤੇ ਲਾਈ ਹੋਈ ਆ ਲੋਕਾ ਨੇ ਹਾਂਜੀ ਉਹ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਜਾਂ ਫਿਰ ਉਹ ਜੰਤ ਦੇਖੋ ਇੱਕ ਤਾਂ ਹਿਰਦੇ ਬਸਿਆ ਹੋਇਆ ਇੱਕ ਤਾਂ ਜੋ ਵਿਚਾਰਾ ਜੰਤ ਸਰੀਰ ਨਾਲ ਜੁੜਿਆ ਹੋਇਆ ਪਰ ਕਿਸੇ ਸਤਿਗੁਰ ਦੇ ਕੋਲ ਕਿਸੇ ਮਤਲਬ ਗੁਰਮੁਖ ਦੇ ਕੋਲ ਜਿਹੜਾ ਗਿਆ ਗੱਲ ਸੁਣ ਉਹਦਾ ਵੀਰਦਾ ਹਰਾ ਭਰਾ ਹੋ ਜਾਂਦਾ ਜਾ ਕੇ ਦੇਖਿਆ ਬਿੜਿਆ ਗੱਲ ਬਾਤ ਸੁਣੀ ਦੇਖਿਆ ਤਾਲੀ ਦੇਖਿਆ ਜਿਉਂ ਦੀ ਗੱਲ ਸੁਣੀ ਇਧਰ ਉਹਦਾ ਅੰਦਰ ਉਹ ਦੇਖਣਾ ਹੁੰਦਾ ਕਿ ਅੰਦਰ ਕੀ ਹੈ ਕਿੱਥਾ ਬੋਲਦਾ ਵਸ ਕੋਈ ਸਰੀਰ ਦਾ ਹੀ ਦੇਖਣਾ ਹਾਂਜੀ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣੀਆਂ ਮਾਈ ਗੁਰੂ ਜਣਿਆ ਗੁਰੂ ਸਰੀਰ ਤਾਂ ਹੈ ਨਹੀਂ ਗੁਰੂ ਤਾਂ ਗਿਆਨ ਜਾਦੂ ਗੁਰੂ ਕਿ ਆਇਆ ਕਿ ਉਹ ਜਾਦੂ ਗੁਰੂ ਨਹੀਂ ਲੱਗਦਾ ਇੱਥੇ ਤਾਂ ਗੱਲ ਦੀ ਬਾਣੀ ਹੈ। ਠੀਕ ਹੈ। ਜਾਂ ਫਿਰ ਸ਼ਬਦ ਗੁਰੂ ਪਰ ਸ਼ਬਦ ਗੁਰੂ ਤਾਂ ਜਨ ਲਈ ਕੀਤਾ। ਕੀ ਮਸਲੇ ਨੇ? ਜਿਹੜੇ ਨੇ ਕੀ ਕਰ ਦਿੱਤਾ ਕੀ ਸੀਗੀ ਅਸਲ ਦੇ ਵਿੱਚ ਗੱਲ ਬੁੱਝਣ ਵਾਲੀ ਉਹ ਸਾਰਾ ਠੀਕ ਕਰਨ ਵਾਸਤੇ ਪਹਿਲਾਂ ਪਹਿਰੇ। ਠੀਕ ਗੁਰੂ ਜੀ ਜਿਹੜਾ ਸ਼ਬਦ ਗੁਰੂ ਆ ਤਾਂ ਜਿਹੜੀ ਯਾਦ ਕਰਨ ਉਹਨੂੰ ਤਾਂ ਸਾਰਾ ਸੰਸਾਰ ਪਹਿਲਾਂ ਕੀਤਾ ਆਦਮੀ ਗੁਰੂ ਦਈ ਦੀ ਆਪ ਕਿਹਾ ਹੈ ਗੁਰਬਾਨੀ ਦੇ ਵਿੱਚ ਗੁਰੂ ਅਗਿਆਨੀ ਗੁਰੂ ਕਹੁੰਦਾ ਅਗਿਆਨੀ ਗੁਰੂ ਤਾਂ ਪਰਮੇਸ਼ਰ ਹੈ ਇਹ ਗੁਰੂ ਸੰਸਾਰੀ ਹੈ ਪਹਿਲਾਂ ਸਾਰੀ ਗੁਰੂ ਵਾਲੇ ਸਾਰੇ ਪਹਿਲਾਂ ਗੁਰੂ ਬਣੇ ਹੋਇਆ ਸੀ ਭਾਬੇ। ਹੂੰ। ਤੋਂ ਕੋਈ ਆ ਨਹੀਂ। ਸੰਤ ਬਣਿਆ ਸੀ ਗੁਰੂ ਬਣਿਆ ਸੀ। ਪਰ ਜਿਹਨੇ ਆਰਾਜ ਦੇ ਅੰਨ ਜਾਦ ਇਹ ਫਿਰ ਉਹ ਗੁਰੂ ਹੋ ਗੁਰੂ ਸੀ ਉਹ। ਕਹਿੰਦਾ ਗੁਰੂ ਹੋਵੇ ਕੋਈ ਜਲਦੀ ਪਹੁੰਚਦਾ ਹੋਵੇ ਗਿਆਨਤਾ ਚ। ਪਰ ਜੇ ਆਰਾਜ ਲਵੇ ਫਿਰ ਤਾਂ ਫਿਰ ਤਾਂ ਉਹ ਭਟਕ ਬਣ ਜਾਂਦਾ। ਭੰਤ ਦਾ ਫੁੱਟ ਲੈਂਦਾ ਸੰਤੋਂ ਕਹਿੰਦੇ ਵੀ ਜਿਹੜਾ ਭੰਪੀ ਕਰਦਾ ਕਿਸੇ ਜਿਹੜਾ ਉਹ ਨਾਲ ਤੁਹਾਡੇ ਤੋਂ ਬਣਾ ਹੈ ਕੋਈ। ਭੰਪੀ ਤਾਂ ਭੰਪੀ ਕਰਦਾ ਨੂੰ ਜਿਸੇ ਜੀ। ਕਿਉਂ ਨਹੀਂ ਉਹ ਜਿਹੜੀ ਭੰਪੀ ਕਰਦਾ ਹਾਂ। ਗੁਰੂ ਦੀ ਭੰਪੀ ਲੋ ਕਰਦੇ। ਗੁਰੂ ਤੋਂ ਡਿੱਡੇ ਦਾ ਲੋ। ਫਿਰ ਉਹ ਕਦੇ ਵੀ ਗੁਰੂ ਨਹੀਂ ਕਹਉਂਦਾ ਉਹ ਦਾਸ ਕਹਉਂਦਾ। ਕਬੀਰ ਭਾਵੇਂ ਪਹਿਲਾਂ ਸੰਤ ਕਹਉਂਦਾ ਹੋਵੇ ਆਪਣੇ ਆਪ ਨੂੰ। ਬਾਅਦ ਨਹੀਂ ਕਹਉਂਦਾ। ਬਾਅਦ ਚਾਹਿਆ ਕਿ ਸੰਤ ਨਾ ਕੋਪਾ। ਕਾਕੇ ਹਰਕੇ ਸੰਤ ਕਹਿੰਦਾ ਸੰਤ ਨਹੀਂ ਕਹਿੰਦਾ ਹਰਕੇ ਸੰਤ ਹਰ ਵੱਡਾ ਸੰਤ ਛੋਟਾ ਧੰਨ ਧੰਨ ਗੁਰੂ ਜਿਨ ਨਾਮ ਰੱਧਿਆ ਆਪ ਤਰਿਆ ਜਿਨੀ ਡਿਠਾ ਤਿਨਾਂ ਲੈ ਛਡਾਇਆ ਆਪ ਤਰਿਆ ਦੇਖੋ ਉਹ ਗੁਰੂ ਪਹਿਲਾਂ ਆਪ ਤਰਿਆ ਦੇ ਜਿਹਾ ਹੂ ਤੂੰ ਸਮਝੀ ਗੱਲ ਕੀ ਹੈ ਇਹ ਗੁਰਲਾਬ ਦੁੱਤ ਦਾ ਨਾ ਗੁਰਤਾ ਕਰੇ ਹੋਇਦਾ ਨੂੰ ਹੈ ਹਾਂ ਇਹ ਉਹ ਗੁਰੂ ਹੈ ਜਿਹਦਾ ਜੀ ਤਰਿਆ ਗੁਰੂ ਜਿਹਦਾ ਦਿਲ ਦੇ ਹਾਂ ਜਿਹੜਾ ਡੁੱਬਿਆ ਹੋਇਆ ਆਪ ਡੁੱਬਿਆ ਹਾਂ ਮੁੰਡੋ ਤੇ ਗੁਰੂ ਕੀ ਜਾਤੇ ਪਰਬ ਤੇ ਜਾਏ ਉਸ ਗੁਰੂ ਦੀ ਗੱਲ ਹੈ ਜਿਹਦੇ ਬਾਰੇ ਇੱਕੋ ਆਈ ਹੋਈ ਹੈ ਠੀਕ ਹੈ ਸਾਰੇ ਤਾਂ ਵੀ ਉਹ ਧੰਨਾ ਆਪ ਤਰਿਆ ਪਹਿਲਾਂ ਵੀ ਤਰਿਆ ਆਇਆ ਜੀ ਗੁਰੂ ਕੋਲ ਆਇਆ ਤਰਿਆ ਜੀ ਜੇ ਡੁੱਬਿਆ ਹੋਇਆ ਸੀ ਸਭ ਉਹ ਤਾਂ ਵੀ ਡੋਬ ਰਿਹਾ ਸੀ ਹਾਂ ਜਾਣ ਲਿਆ ਵੀ ਛਡਾ ਲੈਂਦਾ ਆਪ ਦਾ ਤਰਿਆ ਹੈ ਉਹ ਧੂਏ ਜਿਹੜੇ ਉਹਦੇ ਨਾਲ ਜੁੜੇ ਨੇ ਸਭ ਪੱਟਾ ਦੇ ਗੁਰਬਾਣੀ ਨੂੰ ਸਮਝ ਲਿਆ ਗੁਰੂ ਨੂੰ ਸਮਝਿਆ ਅੰਦਰੋਂ ਅਵਸਥਾ ਨੂੰ ਸਮਝਿਆ ਆਪਣੀ ਅਵਸਥਾ ਉਸ ਜੀ ਬਗਾਲੀ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਹਰ ਕਰਕੇ ਉਹਦੇ ਮੇਰਾ ਉਹਦੇ ਨਾਲ ਮੇਲ ਕਰਾ ਮੈਂ ਉਹਦੇ ਚਰਨ ਧੋਵਾਂ ਜਾਂ ਲੋੜਿਕ ਧੋਵੈ ਪਾਏ ਜਨ ਜਾਨ ਜਿਹੜਾ ਜਿਹਦੇ ਜਾਨੂ ਲਿਆ ਹੋਇਆ ਉਹ ਜਲ ਸਰੀਰ ਤੇ ਸਤਗੁਰ ਦਰਾਰੇ ਜਲ ਉਹ ਹਾਂਜੀ ਪੌੜੀ ਸੱਚ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ ਸੱਚਾ ਸਤਗੁਰ ਅਮਰ ਹੈ ਦੇਖੋ ਸਤਗੁਰ ਵੀ ਹੁਣ ਸੱਚਾ ਨਾਲ ਦਾ ਤਾਲਫ ਸਤਿਗੁਰੂ ਬੀਬੀ ਘਾਤੀ ਡੁਪਲੀਕੇਟ ਬਣ ਜਾਂਦੀ। ਸਤਿਗੁਰ ਕਹੌਣ ਲਾਗੇ ਆਪਣੀ ਬੇਤੇ ਕਹੌਣ ਦੇ ਲਈ ਸਤਿਗੁਰ ਗਮਧਾਰੀਆਂ ਤੇ ਕਹਿੰਦੇ ਨੇ ਬਲਕਿ ਉਹ ਤਾਂ ਸਤਿਗੁਰ ਕਹਿੰਦੇ ਨੇ ਇਹ ਅਮਰ ਉਹ ਤਾਂ ਅਮਰ ਬੱਚਾ ਸਤਿਗੁਰ ਦਾ ਅਬਰ ਹੋਣਾ ਕਦੇ ਜਰੂਰ ਚ ਆਇਆ ਹੀ ਨਹੀਂ ਹੈ। ਅਮਰ ਹੈ ਅਮਰ ਹੋਇਆ ਨਹੀਂ ਦੇਖੋ ਇਹ ਵੀ ਫਰਕ ਹੈ। ਇਕਦਾਮਰ ਹੋਇਆ ਇਹ ਤਾਂ ਉਹ ਪਹਿਲਾਂ ਹੀ ਆ ਉਹ ਸੱਚਾ ਸਤਗੁਰ ਤਾਂ ਭਰੇ ਰਹਿੰਦਾ ਹਮੇਸ਼ਾ ਉਹ ਤਾਂ ਮਾਇਆ 'ਚ ਕਦੇ ਜੁੜਦਾ ਹੀ ਨਹੀਂ ਉਹਦਾ ਅੰਸ਼ ਜਿਹੜਾ ਜੀਵ ਜੁੜਦਾ ਹੈ ਆਪ ਨਹੀਂ ਜੁੜਦਾ ਉਹ ਫੇਹੀ ਵਰਤਾ ਤੇ ਸੱਚ ਸੱਚਾ ਸਤਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਵਿਖਮਾਰੇ ਸੱਚਾ ਸਤਗੁਰ ਪੁਰਖ ਹੈ ਕਾ ਪੁਰਖ 12 ਦਾ ਦੇਖ ਲੂ ਠੀਕ ਹੈ ਹੈ ਤਾਂ ਜਨੂ ਦੇ ਵਿੱਚ ਉਹ ਪਰ ਜਨਮ ਉਹ ਦਾਲ ਵਾਲੀ ਗੱਲ ਨਹੀਂ ਸਮਝੇ ਹੋਏ ਹੈ ਵੀ ਸਰੀਰ ਤੇ ਪਰੇ ਬੈਠਾ ਹੈ ਅੰਤਰਾਤਮਾ ਆਹ ਆਤਮਾ ਔਰ ਆਤਮਾ ਜਿਵੇਂ ਆਪਾਂ ਕਹਿੰਦੇ ਆਪਣੇ ਅਸਵਾ ਨੂੰ ਜਾਣ ਕੇ ਕਹੇ ਠੀਕ ਹੈ ਦੀ ਆਵਾਜ਼ ਨਾਲੇ ਕੰਪ ਕਰੋ ਅੰਤਰਾਤਮਾ ਦੀ ਆਵਾਜ਼ ਸਾਰੇ ਵਿੱਚ ਹੋ ਜਾਂਦੀ ਉਹਦੇ ਇਹਨਾਂ ਤੇ ਉਹਨਾਂ ਤਾਂ ਜੰਦੇ ਸਾਰਿਆਂ ਨੂੰ ਉਹ ਦੀ ਆਵਾਜ਼ ਪਹਿਲੀ ਪੰਕਤੀ ਸੀ ਸਤ ਸੱਚਾ ਸਤਗੁਰੂ ਅਮਰ ਹੈ ਦੇ ਵਿੱਚ ਉਹਦਾ ਤਾਂ ਪ੍ਰਗਟ ਹੈ ਅੱਛਾ ਉਹਦੇ ਹਰ ਦੇ ਵਿੱਚ ਹਰ ਦੇ ਤਾਂ ਉਹ ਤਾਂ ਤਾਂ ਨੂੰ ਜੇ ਸਤਗੁਰ ਕਹਾ ਵੀ ਲਵੇ ਇਹ ਕਹਿ ਵੀ ਨਾਵੇ ਉਹ ਨੂੰ ਸਮਝਿਆ ਨਹੀਂ ਠੀਕ ਹੈ ਸਾ ਪਾਪ ਨੀ ਹੈ। ਸਭੀ ਪਾਪ ਹੈਗਾ। ਪਰ ਜਿਹੜਾ ਹੋਵੇ ਨੀ ਗਾਵੇ। ਠੀਕ ਹੈ। ਆਪ ਡੁੱਬਿਆ ਦੂਜੇ ਨੂੰ ਡੋਬੂਗਾ। ਕਿਉਂ ਨਾ ਉਪਦੇਸ਼ ਜਿਹੜਾ ਦਿਲ ਹੈ ਉਹਦਾ ਖਰਾ ਹੈ ਨਹੀਂ। ਠੀਕ ਹੈ ਜੀ। ਉਹਦਾ ਖਰਾ ਹੈ ਜੀ ਜੋ ਬੋਲੂਗਾ ਅchna ਤਾਂ ਫੰਗਦਾ ਕਿਸੇ ਨੂੰ। ਸਤਗੁਰੂ ਖਾਈ ਜਾਂਦਾ। ਉਹ ਨੁਕਸਾਨ ਕਰੂਗਾ ਫਾਇਦਾ ਨਹੀਂ ਕਰਨਾ। ਠੀਕ ਹੈ ਜੀ। ਹਾਂ ਜੀ। ਪੁਰਖ ਹੈ ਜਿੰਨੀ ਕਾਮ, ਕਰੋਧ, ਬਿਖਮਾਰ। ਆ ਆ ਦੇਖੋ ਦੂਈ ਗੱਲ। ਉਹਨੇ ਕਾਮਨਾ ਦੀ ਉਹਦੇ ਅੰਦਰ ਹੈ, ਕਰੋਧ ਨਹੀਂ ਹੈ, ਭਾਇਆ ਨਹੀਂ ਪਛਾੜੀ ਹੈ, ਦੇਖ ਇਹ ਸਾਰਾ ਮਾਰਿਆ ਹੋਇਆ। ਇਹ ਸ਼ਰਤਾਂ ਨੇ। ਕਿ ਉਸ ਆਦਮੀ ਜਿਹੜਾ ਸਤਗੁਰ ਕਾਉਂਟ ਹੈ, ਅੰਦਰ ਇਹ ਠੀਕ ਹੈ। ਜੇ ਤਾਂ ਇਹ ਖੂਬੀਆਂ ਨੇ, ਫਿਰ ਤਾਂ ਸੁਖਿਓ ਦੇ ਨੇੜੇ ਨੂੰ ਜਾਓ। ਦੇਖ ਲੋ ਸ਼ਾਇਦ ਸਤਗੁਰ ਹੋਵੇ ਉਹ। ਪਰ ਜੇ ਉਹ ਆਪੇ ਵਿਚਾਰਾ ਮਾਇਆ ਦੇ ਵਿੱਚ ਡੁੱਬਿਆ ਹੋਇਆ ਹੈ ਮਾਇਆ ਖਾਤਰ ਸਭ ਕੁਝ ਕਰਦਾ ਛੇ ਤੋ ਉਹ ਸਖਤ ਨਹੀਂ ਹੈ ਹਾਂਜੀ ਕੰਮ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ ਜਾਂ ਦਿੱਠਾ ਜਾਂ ਜਿਸ ਜਨਮ ਹੀ ਜਿਸਨੇ ਵੀ ਸਤਿਗੁਰੂ ਦਾ ਦਰਸ਼ਨ ਕਰ ਲਿਆ ਦਰਸ਼ਨ ਬਾਹਰੋਂ ਵੀ ਉਹਨੂੰ ਸੁਭਿਦ ਲਿਆ ਦਰਸ਼ਨ ਦਾ ਮਤਲਬ ਹੈ ਉਹ ਕਹਿ ਰਿਹਾ ਜੋ ਉਹਦੇ ਕੋ ਗਿਆਨ ਹੈਗਾ ਹੈ ਉਹਨੇ ਆਤਮਾ ਨੂੰ ਜਾਣ ਲਿਆ ਸਤਿਗੁਰ ਨੇ ਪੂਰਾ ਸਤਿਗੁਰੂ ਜਾਣਨਾ ਨਾ ਜੀ ਹਾਂ ਸ਼ਬਦ ਦੇ ਵਿੱਚ ਹੋ ਜਾ ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ ਸਾਚ ਜੇ ਪੂਰਾ ਸਤਿਗੁਰੂ ਦੇਖਿਆ ਸ਼ਬਦ ਜਾਂ ਸ਼ਬਦ ਪੂਰਨ ਨੂੰ ਮਤ ਫੇਰ ਸਭ ਕੁਝ ਕੋਈ ਕਦੇ ਦੇਦੀ ਹੋਈ ਨਹੀਂ ਕਦੇ ਅਖਰ ਦੇ ਵਿੱਚ ਤਾਂ ਕਹਿੰਦੇ ਬੰਦਾ ਛਟਕਾਰਾ ਜਿਆਦਾ ਹੁੰਦਾ ਹੈ ਜਾਦੈ ਭਰੋਸਾ ਕਰੀਦਾ ਹੈ ਜਾਦੇ ਹੈ ਦੇ ਤੋਂ ਦੇ ਲੋਕ ਇਹ ਤਾਂ ਸ਼ਾਂ ਗੱਲ ਵੱਡੀ ਹੈ ਜਿੰਨਾ ਕਿ ਸ਼ਬਦ ਦੇ ਵਿੱਚ ਸੁਰਤ ਲਈ ਨਹੀਂ ਨਾ ਹੋ ਜਾਂਦੀ ਬਾਦੂ ਉਹਦਾ ਜਿਹੜਾ ਖਤਰਾ ਹੀ ਨਾ ਟਰੇ ਨਾ ਠੀਕ ਹੈ ਜੀ ਹੋ ਗੁਰ ਆਪਣੇ ਸਦਾ ਸਦਾ ਘੁੰਮਵਾਰਿਆ ਹਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਆਪਣੇ ਗੁਰ ਤੋਂ ਸਤਗੁਰ ਬਲਿਹਾਰੀ ਸਦਾ ਸਦਾ ਕੋ ਘਾਰੇ ਸਦਾ ਸਦਾ ਉਹਦੀ ਪ੍ਰਕਰਮ ਕਰਦਾ ਕੁੱਪ ਕੁੱਪ ਜਾਉਂਦਾ ਉਹਦੇ ਤੋਂ ਕੁਰਬਾਨ ਜਾਉ ਗੁਰਮੁਖ ਜਿੱਤਾ ਮਨਮੁਖ ਹਾਰਿਆ ਬਸ ਜਿਹੜਾ ਗੁਰਮਖਾ ਉਹ ਥਾਸ ਦੇ ਵਿੱਚ ਇਹਦਾ ਮਨ ਮੁਕਾ ਉਹ ਹਾਰ ਗਿਆ ਬਸ ਉਹਦਾ ਜੰਦੂ ਜਿਹੜਾ ਸੀ ਐਵੇਂ ਚਲਾ ਗਿਆ ਅਜਾਈ ਚਲਾ ਗਿਆ ਠੀਕ ਹੈ ਉਹ ਗੁਰਮੁਖੀ ਜਲਪਦਾਰ ਤਾਂ ਖੱਟੇ ਠੀਕ ਹੈ